ਸੋ ਲੋਕ ਮਹੱਲਾ ਚੌਥਾ ਗੁਰਮੁਖੀ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੇ ਨਾਮ ਪੜੈ ਨਾਮ ਰਹਿ ਲਾਈ ਜਿਹੜੇ ਗੁਰਮਖੰਦ ਆਂਦਰ ਹੁੰਦਾ ਉਹ ਸ਼ਾਂਤ ਹੁੰਦਾ ਦੇ ਅੰਦਰ ਸ਼ਾਂਤੀ ਹੁੰਦੀ ਹੈ ਉਹਨਾਂ ਦਾ ਜਿਹੜਾ ਮਨ ਹੈ ਬਿਲਕੁਲ ਸ਼ਾਂਤ ਹੁੰਦਾ ਕੋਈ ਭੁੱਖ ਮਾਇਆ ਦੀ ਨਹੀਂ ਹੁੰਦੀ ਉਹਦੇ ਚਿੱਤਿਆ ਹੋਇਆ ਮਨ ਹੁੰਦਾ ਮਨ ਤਨ ਨਾਮ ਸਮਾਏ ਮਨ ਕਰਕੇ ਬੁੱਧੀ ਕਰਕੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਨਾਮੋ ਜਤਬਾ ਨਾਮੇ ਜਤਬਦ ਨੇ ਸਾਰਾ ਦਿਨ ਨਾਮ ਦੀਓ ਵਿਚਾਰ ਕਰਦੇ ਨੇ ਸਾਰਾ ਦਿਨ ਗੁਰਬਾਣੀ ਦੀ ਵਿਚਾਰੇ ਕਰਦੇ ਨੇ ਨਾਮ ਪੜ੍ਹੇ ਨਾਮ ਗੁਰਬਾਣੀ ਪੜ੍ਹਣਾ ਨਾਮ ਪੜ੍ਹਣਾ ਗਿਆਨ ਪੜ੍ਹਣਾ ਗਿਆਨ ਕਰਕੇ ਪੜ੍ਹਦੇ ਨੇ ਉਹ ਪੜ੍ਹਨ ਕਰਕੇ ਨਹੀਂ ਪੜ੍ਹਦੇ ਮੈਂ ਗਿਆਨ ਪ੍ਰਾਪਤੀ ਵਾਸਤੇ ਪੜ੍ਹਦੇ ਨੇ ਜੋ ਪੜ੍ਹਦੇ ਨੇ ਉਹ ਜੋ ਕੀ ਸਾਨੂੰ ਮਿਲਿਆ ਕੀ ਅਸੀਂ ਸਮਝਿਆ ਗੁਰਬਾਣੀ ਚ ਸਮਝਣ ਵਾਸਤੇ ਗੁਰਬਾਣੀ ਪੜ੍ਹਦੇ ਨੇ ਆਠ ਕਰਨ ਵਾਸਤੇ ਨਹੀਂ ਪੜ੍ਹਦੇ ਮੈਂ ਪੜ੍ਹਟ ਕਰ ਲਿਆ ਜੀ ਪੰਜ ਬਾਣੀਆਂ ਦਾ ਮੈਂ ਪੜ੍ਹਟ ਕਰ ਲਿਆ ਸਮਝ ਕੁਝ ਵੀ ਨਾਮ ਪੜ੍ਹਦੇ ਨੇ ਨਾਮ ਰਹਿਣੇ ਬਲਾਈ ਜੋ ਪ੍ਰਾਪਤ ਕਰ ਲਿਆ ਉਹਦੇ ਨਾਲ ਉਹਨਾਂ ਦੀ ਫਿਰ ਧਿਆਨ ਜੁੜਿਆ ਰੋਜ਼ ਦੋ ਗੱਲਾਂ ਦਾ ਨਵਾਂ ਪਤਾ ਲੱਗਦਾ ਰਹਿੰਦਾ ਉਹਨਾਂ ਨੂੰ ਵੀ ਰਹਿੰਦਾ ਅਸੀਂ ਕੁਝ ਰੋਜ਼ ਪ੍ਰਾਪਤੀ ਕਰ ਰਹੇ ਹਾਂ ਅੰਦਰ ਧਿਆਨ ਤੇ ਰਹਿੰਦਾ ਉਹਨਾਂ ਦਾ ਤਸੱਲੀ ਰਹਿੰਦੀ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਇਹਨਾਂ ਲਾਂਪਾਂ ਦਾ ਪਾਲਿਆ ਉਹਦੀ ਚਿੰਤਾ ਦਾ ਲੈੜੇ-ਟੇੜੇ ਬਣੀ ਜਾਂਦੀ ਉਹ ਤਾਂ ਪਤਾ ਨਹੀਂ ਜਨਤਾ ਗੱਦਰ ਪੱਜ ਗਈ ਜ਼ਬਦੀ ਉਹ ਚਿੰਤਾ ਠੀਕ ਹੁੰਦਾ ਜੀ ਚਲੀ ਗਈ ਹਾਂਜੀ ਹਾਂ ਦੂਰ ਚਲੀ ਗਈ ਸਤਗੁਰ ਮਿਲਿਆ ਨਾਮ ਉਪਜੈ ਕ੍ਰਿਸ਼ਨਾਂ ਭੁੱਖ ਸਭ ਜਾਏ ਨਾਨਕ ਨਾਮੇ ਰੱਤਿਆਂ ਨਾਮੋਂ ਪੱਲੇ ਪਾਏ ਸਤਗੁਰ ਮਿਲਿਆ ਨਾਮ ਉਪਜੈ ਇਹ ਸਤਗੁਰ ਜਿਹੜਾ ਅੰਦਰ ਆ ਆਪਣਾ ਮੂਲ ਹੈ ਉਹਦੇ ਨਾਲ ਜਦ ਮਿਲ ਕੇ ਰਹਿੰਦਾ ਨਾ ਮਨ ਨੂੰ ਜੀਵ ਫਿਰ ਨਾਮ ਅੰਦਰੋਂ ਹੀ ਪੈਦਾ ਹੁੰਦਾ ਤੇ ਕੋਈ ਤਾਂ ਉਪਜਾ ਸਤਗੁਰ ਵੱਲ ਵਿੱਚੋਂ ਹੀ ਬਰਜ ਪੈਦਾ ਹੁੰਦਾ ਨਾ ਉਪਜਾ ਤੇ ਭੁੱਖ ਜਾਏ ਫਿਰ ਤੇ ਭੁੱਖ ਹਮੇਸ਼ਾ ਵਾਸਤੇ ਚਲੀ ਜਾਂਦੀ ਨਾਨਕਾ ਨਾਮ ਨੇ ਰਤਿਆ ਨਾਮੋਂ ਪੱਲੇ ਪਾਇ ਜਿਦੋਂ ਨਾਮ ਦਾ ਰੰਗ ਚੜ ਜਾਂਦਾ ਨਾਨਕ ਕਹਿੰਦੇ ਨੇ ਦੇਨੂ ਨਾਮ ਦਾ ਰੰਗ ਚੜ ਜਾਂਦਾ ਨਾਮੋ ਰਤਿਆ ਨਾਮੋ ਪੱਲੇ ਪਾਏ ਪੈਂਦਾ ਹੀ ਰਹਿੰਦਾ ਨਾਮ ਉਹਦੇ ਪੱਲੇ ਉਹਨੂੰ ਤੁਰਕੀ ਬਾਣੀ ਸੁਣਦੀ ਹੀ ਹੈ ਦਾਹ ਤੇ ਗਾਂ ਅਵਸਥਾ ਉੱਚੀ ਹੋਉਂਦੀ ਰਹਿੰਦੀ ਹੈ ਰੋਜ਼ ਉੱਚੀ ਤੋਂ ਉੱਚੀ ਹੁੰਦੀ ਰਹਿੰਦੀ ਹੈ ਭਗਵੰਤ ਕਿ ਉੱਚਾ ਤੇ ਹੁੱਚਾ ਜਿੰਨਾ ਮਰਜ਼ੀ ਉੱਤੇ ਚੜੀ ਜਾਵੇ ਭਗਵੰਤ ਉੱਚਾ ਹੀ ਰਹਿਣਾ ਇਹ ਤੋਂ ਹਾਂਜੀ ਮਹੱਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆਂ ਕਰ ਛੋੜ ਗਿਆ ਉਸ ਪਿੱਛੇ ਵੱਜੇ ਫੱਕੜੀ ਮੂੰਹ ਕਾਲਾ ਆਗਿਆ ਪਿਆ ਸਤਗੁਰ ਪੁਰਖ ਜੇ ਮਾਰਿਆ ਜਾਂ ਸਤਗੁਰ ਪੁਰਖ ਨੇ ਮਾਰਿਆ ਨਾ ਭ੍ਰਮ ਨੂੰ ਭ੍ਰਮ ਫਿਰ ਛੋੜੇ ਗਿਆ ਭ੍ਰਮ ਸਤਗੁਰ ਪੁਰਖ ਤੇ ਐਸੀ ਮਾਰ ਮਾਰੀ ਭ੍ਰਮ ਤੇ ਜਿਹੜਾ ਭਰਮ ਦੇ ਵਿੱਚ ਭਰਮਿਆ ਹੋਇਆ ਸੀ ਨਾ ਮਾਨ ਲਓ ਉਹ ਤੇਰੀ ਕੁੜੀ ਛੱਡ ਗਿਆ ਆਪਣੇ ਘਰ ਛੱਡਿਆ ਆ। ਅੱਛਾ ਜੀ। ਉਹ ਤੇਰੀ ਨਾ ਕਰਕੇ ਤੇਰੀ ਕੁੜੀ ਜਾਂਦਾ ਸੀ ਉੱਥੋਂ ਛੱਡ ਕੇ ਕਹਿੰਦੇ ਛੱਡਿਆ ਆ ਉਥੋਂ। ਉੱਥੇ ਜੀ। ਫਿਰਦੇ ਚ ਆ ਕੇ ਇਹ ਬਸ ਫਿਰ ਸਥਿਰ ਹੋ ਗਿਆ ਹਾਂ ਉਹ ਫਿਰ ਫੱਕੜ ਹੋ ਗਿਆ ਕਿਹਾ ਕਿ ਪਿਛੇ ਵੱਜੇ ਫੱਕੜੀ ਮੂੰਹ ਕਾਲਾ ਅੱਗੇ ਭਇਆ। ਜਿਹੜਾ ਮੂੰਹ ਕਾਲਾ ਸੀਗਾ ਉਹ ਫੱਕੜ ਹੋ ਗਿਆ। ਅੱਗੇ ਕਰ ਲਿਆ ਅੱਗੇ ਜਲ ਹੋ ਗਿਆ ਨਾ ਅੱਗੇ ਅੱਗੇ ਜਿਵੇਂ ਉਹ ਪੁਲਿਸ ਵਾਲੇ ਅੱਗੇ ਕਰ ਲੈਂਦੇ ਨੇ ਅੱਗੇ ਲਾ ਲਿਆ ਮਾਨ ਹੁਣ ਬੰਦ ਕਾਬੂ ਕਰ ਰੋਸ਼ਨੀ ਪਈ ਪਤਾ ਲੱਗਿਆ ਤੇਰੇ ਗਿਆਨ ਕੁਛ ਵੀ ਨਹੀਂ ਹੈਗਾ ਅੱਛਾ ਜੀ ਇਹਨਾਂ ਨੇ ਜਿਹੜੇ ਅਰਥ ਕੀਤੇ ਮੈਂ ਉਹ ਪੜ ਦੇਣਾ ਜਿਸ ਨੂੰ ਸਤ ਪੁਰਖ ਨੇ ਮਾਰ ਦਿੱਤਾ ਉਹ ਭਰਮ ਵਿੱਚ ਭਟਕਦਾ ਹੋਇਆ ਆਪਣਾ ਘਰ ਛੋੜ ਕੇ ਬਾਹਰ ਚਲਾ ਗਿਆ ਜਰੂਰ ਨਾ ਪਰਮ ਥੋੜੀ ਪਾਇਆ ਤਾਂ ਪਰਮ ਕੱਟਿਆ ਮਾਰਿਆ ਜੇ ਮਨ ਮਰਿਆ ਹੈ ਤਾਂ ਉਹਦਾ ਪਰਮ ਛੁੱਟਿਆ ਚਲੋ ਇਹਨਾਂ ਨੇ ਕਰ ਲੈ ਠੀਕ ਹੈ ਪੰਕਤੀ ਥੋੜੀ ਜੀ ਪਹਿਲੇ ਖਾ ਹੈ ਉਸ ਪਿੱਛੇ ਵੱਜੇ ਆਹੋ ਪਹਿਲੇ ਉਹ ਇਸੇ ਕਰਕੇ ਉਹਨਾਂ ਨੇ ਅਰਥ ਕਰ ਲਿਆ ਨਾ ਦੋਵੇਂ ਪਾਸੇ ਅੱਗੇ ਅੱਗੇ ਲਾ ਲੈਣਾ ਜਿਵੇਂ ਅੱਗੇ ਦੇਖੋ ਨਾ ਜਿਹੜੀ ਬੋਝ ਹਾਰ ਜਾਂਦੀ ਹੈ ਹਾਂਜੀ ਜੇ ਮਨ ਹਾਰ ਮੰਨਦਾ ਫਿਰ ਅਸਕੇ ਹੋ ਲੰਦਾ ਵਿਚਾਰ ਹਾਰ ਬੰਦ ਕੇ ਦੇਦੇ ਹੀ ਹੋਣਾ ਫਿਰ ਉਹਨੇ ਠੀਕ ਹੈ ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਛੁੱਟਦਾ ਮੂਆ ਉਦੋਂ ਪਹਿਲੀ ਵਾਸਾ ਕੀ ਸੀ ਉਹਦੇ ਪਹਿਲਾਂ ਸੀ ਜਿੰਨਾ ਚਿਰ ਉਹ ਮਨਮੁਖ ਸੀ ਉਹਨਾਂ ਜਰ ਉਲਟ ਫੁਟ ਬੋਲਦਾ ਦੀ ਮੰਗ ਉਹਨਾਂ ਜਰ ਗੋ ਉਠਾ ਬੋਲਦਾ ਸੀ ਐਂ ਕਹੋ ਸੀ ਜਿਹੜਾ ਬੂਰੇ ਹੁਣ ਲਾਕੇ ਤੁਰ ਪਿਆ ਰਾਮ ਨਾਲ ਛੁੱਟਦਾ ਮੂਆ ਸੋੜਦਾ ਸੋੜਦਾ ਹੀ ਮਾਰਿਆ ਚੱਕ ਉਹ ਨਾਜਰ ਚੱਕ ਸੁੱਟੀ ਗਿਆ ਨਾਜਰ ਮਾਰਨੀ ਗਿਆ ਹਰ ਮੰਨਨੀ ਗਿਆ ਉਹਨਾਂ ਚ ਲੜਦਾ ਰਿਹਾ ਮੂਰੇ ਜਵਾਬ ਕਰਦਾ ਰਿਹਾ ਪਰ ਜੇ ਮਰ ਗਿਆ ਫੇਰ ਦੇਖੋ ਜਿਹੜੀ ਪਹਿਲੀ ਪੰਕਤੀ ਹੈ ਨਾ ਸਤਗੁਰੂ ਨੇ ਜਿਹੜਾ ਮਾਰਿਆ ਜੇ ਤਾਂ ਸਤਗੁਰੂ ਨੇ ਮਾਰਿਆ ਉਹਦਾ ਤਾਂ ਹੋਇਆ ਕਲਿਆਣੇ ਹੁਣ ਗਾਹ ਕਲਿਆ ਵਾਲੀ ਵਸਾਈ ਚੱਲੂਗੀ ਸਤਗੁਰੂ ਮਾਰ ਕੇ ਨਰਕਾਂ ਚ ਨਹੀਂ ਲੈ ਕੇ ਜਾਂਦਾ ਇਹ ਤਾਂ ਜੇ ਪਹਿਲਾ ਮਰਨ ਕਬੂਲ ਵਾਲੀ ਗੱਲ ਐ ਨਰਕਾਂ ਚਲੇ ਗਏ ਸਾਰੀ ਫਲਸਫੀ ਉਲਟਾਉਣੀ ਪੈ ਜੂ ਇੱਥੇ ਆਪਾਂ ਨੂੰ ਜੋ ਪਿੱਛੇ ਕਰਕੇ ਆਏ ਆ ਪਹਿਲੀ ਪੰਕਤੀ ਹਾਲਤ ਸੀ ਪਹਿਲਾਂ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਹੁਣ ਇਹ ਕਿਹਨੂੰ ਕਹਿ ਰਹੇ ਪਹਿਲਾਂ ਉਹਦੀ ਵਿਰੋਧ ਜਾਂ ਕਰਦਾ ਤਾਂ ਮਰਨ ਤੋਂ ਪਹਿਲਾਂ ਦੀ ਹਾਲਤ ਇਹ ਸੀ ਮਰਨ ਤੋਂ ਪਹਿਲਾਂ ਵੀ ਚੱਗ ਸੜਦਾ ਰਿਹਾ ਉਹ ਮਰ ਕੇ ਛੱਗ ਸੁੱਟਣ ਦੇ ਹੱਦਿਆਂ ਚੁੱਪ ਕੀਤਾ ਚੁੱਪ ਕਰਨਾ ਮਰਨਾ ਹੁੰਦਾ ਜਿੰਨਾ ਜਿਹੜੇ ਬੋਲਦਾ ਮਨ ਉਹਨਾਂ 'ਚ ੱਗੇ ਛੱਡਦਾ ਇਹ ਆਦਾ ਚੁੱਪ ਕਰ ਜਵੇ ਬੋਲੂ ਤਾਂ ਇਹ ਉਲਟੀੋ ਬੋਲੀ ਬੋਲਦਾ ਬੋਲਦਾ ਜਿੰਨਾ ਚਿਰ ਠੀਕ ਹੈ ਪਰ ਇਹ ਹੁਣ ਫਿਰ ਐਂ ਲੱਗਦਾ ਬਿਲਕੁਲ ਠੀਕ ਹੈ ਨੇ ਤੁਸੀਂ ਲੱਗਦਾ ਐਵੇਂ ਹੀ ਫੱਕੜੀ ਕੀ ਹੁੰਦਾ ਜੀ ਫੱਕੜੀ ਪਿੱਛੇ ਵੱਜਿਆ ਫੱਕੜੀ ਮੂੰਹ ਕਾਲਾ ਅੱਗੇ ਪਿਆ ਫੱਕੜਾ ਲੱਗੇ ਅੰਦੇ ਹੋ ਗਿਆ ਮੇ ਤਾਂ ਫੱਕੜ ਹੋ ਗਿਆ ਉਹ ਫੱਕੜੀ ਹੈ ਫੂ ਫੱਕੜੀ ਵੱਜਦਾ ਫਿਰ ਉਹਨੂੰ ਫੱਕੜ ਕਹਿੰਦੇ ਨੇ ਜਿਹੜਾ ਹਾਰ ਮੰਨਿਆ ਮਰਿਆ ਹੋਇਆ ਮਨ ਹੈ ਉਹ ਨੂੰ ਨਹੀਂ ਬੁੜਾਖਿਆ ਹੋਇਆ ਇਹ ਕਹਿੰਦੇ ਫੱਕੜੀ ਨੂੰ ਬਦਨਾਮੀ ਦੀ ਡੋਂਡੀ ਨਹੀਂ ਨਹੀਂ ਹੰਤ ਹੋਏ ਹੈ ਜਿਹੜੇ ਮਾਰੇ ਮਾਰਤੇ ਸਤਗੁਰ ਦੇਵਤਾ ਹੈ ਸਤਗੁਰ ਜਾਗਤਾ ਹੈ ਦਿਓ ਪੂਲੀ ਮੰਦਣੀ ਆਏ ਹੋਏ ਸੁਰਗ ਹੋਏ ਸੁਰਗਾਮੀ ਮਾਰੇ ਦੇਵਤਾ ਜਿਹੜੇ ਦੇਵਤਾ ਨੇ ਮਾਰ ਦਿੱਤੇ ਜਿਹੜੇ ਦੇਵਤਾ ਦੇ ਸਾਹਮਣੇ ਲੜ ਮਰ ਗਏ ਲੜਦੇ ਲੜ ਕੇ ਮਰ ਗਏ ਹਾਰ ਮੰਨ ਗਏ ਉਹਦਾ ਸੁਰਗ ਦੇ ਗਾਮ ਹੀ ਹੁੰਦੇ ਨੇ ਇਹ ਵੀ ਫੇਰ ਸਾਨੂੰ ਬਦਲਣਾ ਪੈ ਨੇ ਬਹੁਤ ਬਿਲਕੁਲ ਸਲਿੱਪ ਹੋ ਜਾਂਦੀ ਗੱਲ ਕਿੱਥੋਂ ਗੱਲ ਬਦਲ ਰਹੀ ਆ ਕੋਈ ਪੱਖ ਬਦਲ ਨਹੀਂ ਰਹੀ ਉਹ ਜਿਹੜਾ ਬੰਦਾ ਸੀ ਜਿੰਨਾ ਚਿਰ ਬੋਲਦਾ ਰਿਹਾ ਉਹਨਾਂ ਚਾਹ ਚੱਕ ਸੁੱਟਦਾ ਰਿਹਾ ਜਿੰਨਾ ਚਿਰ ਮਨ ਬੋਲੂਗਾ ਵਿਰੋਧ ਕਰੂਗਾ ਉਹ ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ ਗੁਰਬਾਨੇ ਦਾ ਵਿਰੋਧ ਕਰਦੇ ਨੇ ਉਹਨਾਂ ਦੇ ਹੈ ਹੁ ਬਦਲ ਕਿੱਥੋਂ ਰਹੀਏ ਗੱਲ ਸਤਗੁਰ ਪੁਰਖ ਜੇ ਮਾਰਿਆ ਉਹੀ ਆਦਮੀ ਹੈ ਮਿੰਟ ਪਹਿਲਾਂ ਉਹ ਮੰਨਦਾ ਨਹੀਂ 2 ਮਿੰਟ ਬਾਅਦ ਮੰਨ ਗਿਆ ਉਹ ਮੰਨ ਗਿਆ ਦੇਵਤਾ ਹੋ ਗਿਆ ਜਿੰਨਾ ਚਿਰ ਮੰਨਦਾ ਨਹੀਂ ਸੀ ਉਹਨਾਂ ਚ ਰਾਖਸ਼ ਸੀ ਪਰ ਪਹਿਲਾਂ ਤਾਂ ਇੱਥੇ ਤਾਂ ਮੰਨਣ ਦੀ ਗੱਲ ਸ਼ੁਰੂ ਹੋ ਗਈ ਉਸ ਤੋਂ ਬਾਅਦ ਫਿਰ ਦੂਈ ਸ਼ੁਰੂ ਹੋਈ ਹੋਈ ਹੈ ਉਹ ਦੂਰੀ ਵਸਤ ਦਾ ਸੀ ਯੂ ਮਰ ਗਿਆ ਜੇ ਮਰ ਨਹੀਂ ਗਿਆ ਚੱਕ ਛੁੱਟਣ ਦੇ ਹੜਿਆ ਵੀ ਹੈ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਸੀਂ ਪਿੱਛੋਂ ਆਓ ਨਾ ਕਹਿੰਦਾ ਉਹ ਪੁਰਖ ਪੁਰਖ ਮਾਰਿਆ ਸਤਗੁਰ ਪੁਰਖ ਨੇ ਜਿਹੜਾ ਮਾਰਿਆ ਪਰ ਅੰਮਾ ਪਰ ਮਿਆ ਘਰ ਛੋੜ ਗਿਆ ਜਿਹੜਾ ਧਰਮ ਦੇ ਵਿੱਚ ਪਰਮ ਗਿਆ ਹੋਇਆ ਸੀ ਉਹ ਆਪਣਾ ਜਿਹੜਾ ਘਰ ਸੀ ਜਿੱਥੇ ਜਾ ਕੇ ਛੱਡ ਸੁਰਦਾ ਸੀ ਉਹ ਘਰ ਛੱਡਦਾ ਸੀ ਉਹ ਘਰ ਛੱਡਦਾ ਠੀਕ ਮਾਰਿਆ ਕਹਿਣ ਦਾ ਪਰ ਆਪ ਪੁਰਖ ਨੇ ਜਦੋਂ ਗਿਆਨ ਦੇ ਨਾਲ ਜਿਹੜਾ ਮਾਰ ਦਿੱਤਾ ਗਿਆਨ ਦੀ ਸ਼ਕਤੀ ਮਾਰਿਆ ਤਾਂ ਗਿਆਨ ਚਲੋ ਸਤਗੁਰ ਨੇ ਲੱਗਦੀ ਭੋਲ ਮਿਲ ਗਿਆ ਭੋਲੇ ਮਿਲ ਗਿਆ ਲਫਜ਼ ਮਰਿਆ ਕਰੇ ਟੂ ਫੇਕ ਹੁਣ ਮਰਿਆ ਕਿੱਥੇ ਜਾ ਕੇ ਮਰਿਆ ਇਹੋ ਥੱਲੇ ਆ ਕੇ ਆਹੋ ਪਿੱਛੇ ਵੱਜੇ ਫੱਕੜੀ ਕੀ ਸ਼ੁਰੂ ਹੋ ਰਿਹਾ ਹੁਣ ਦੁਬਾਰਾ ਇਹਦੇ ਬਾਅਦ ਮਰੇ ਤੇ ਬਾਅਦ ਉਹ ਫੱਕੜ ਵੱਜਦਾ ਕੋਈ ਅੱਗੇ ਤਾਂ ਕਹਿੰਦੇ ਮੂੰਹ ਕਾਲਾ ਅੱਗੇ ਪਿਆ ਜਿਹਦਾ ਮੂੰਹ ਕਾਲਾ ਅੱਗੇ ਅੱਗੇ ਲੱਗਦਾ ਹਾ ਗੁਰੂ ਦੇ ਅਨਸਾਰ ਚੱਲ ਪਿਆ ਉਹ ਜਿਵੇਂ ਕਿਸੇ ਨੂੰ ਅੱਗੇ ਲਾ ਲਈਦਾ ਹਾਰ ਮੰਨਣ ਵਾਲਾ ਅੱਗੇ ਲੱਗ ਜਾਂਦਾ ਫਿਰ ਗੁਰੂ ਦੀ ਗੱਲ ਕਰਦਾ ਹੁਣ ਉਹ ਹਮ ਕੂਕਰ ਤੇਰੇ ਦਰਬਾਰ ਭੌਕੇ ਅੱਗੇ ਉਹ ਦਰਬਾਰ ਦਾ ਕੂਕਰ ਆਪਣੇ ਆਪ ਨੂੰ ਅੱਗੇ ਰੱਖ ਕੇ ਆਪਣਾ ਸਰੀਰ ਅੱਗੇ ਕੇ ਭੌਂਕਦਾ ਜਿਵੇਂ ਉਹ ਬੁਲਾਉਂਦਾ ਉਹ ਬੋਲਦਾ ਉਹ ਜਿਹੜਾ ਫਿਰ ਦੁੱਖ ਸੁੱਖ ਆਪਣੇ ਸਰੀਰ ਤੇ ਸਹਿੰਦਾ ਦੇਹ ਵਿਦੇਸ਼ ਨੂੰ ਵਾਰਿਆ ਜਾਂਦਾ ਠੀਕ ਹੈ ਮਨ ਐਸੀ ਹਰ ਜੋ ਬੀਤ ਕਰ ਜੈਸੀ ਜਲਦੁਦ ਹੋਏ ਆਵਟਣ ਆਵੇ ਖਬਰ ਜਲ ਕੋ ਖਬਰ ਨਹੀਂ ਆਪ ਛੜਦਾ ਮਤਲਬ ਇਹ ਦੁੱਧ ਨੂੰ ਨਹੀਂ ਖਬਰ ਦਿੰਦਾ ਅੱਗੇ ਅੱਗੇ ਚੱਲੀ ਨਾ ਅੱਗੇ ਕਹਿੰਦੇ ਆ ਉਸ ਅਲ ਬਰਲ ਮੋਹ ਨਿਕਲ ਆਇਆ ਮਤਲਬ ਹੁਣ ਕੌਣ ਕਿਹਦੇ ਰਹੀ ਆ ਹਾਂ ਪਹਿਲਾ ਨਿਕਲਦੀ ਸੀ ਜਿਹਦੇ ਮੂੰਹ ਤੋਂ ਅਲ ਬਰਲ ਜੇ ਉਹ ਤਾਂ ਮੂੰਹ ਨਹੀਂ ਦਿਹਾਉਦਾ ਹੁਣ ਤਾਂ ਮਨਮੁਖੀ ਜਦੋਂ ਜੇ ਮਨਮੁਖੀ ਮੂੰਹ ਸੀਗਾ ਅਲ ਨਿਕਲਦੀ ਸੀ ਹੁਣ ਤਾਂ ਉਹਦਾ ਮੂੰਹ ਹੀ ਨਹੀਂ ਰਿਹਾ ਜਿੰਨਾ ਜਰ ਮੂੰਹ ਆਲਵਲ ਨਿਕਲੂਗੀ ਜੇ ਗੁਰਮੁਖ ਹੋ ਗਿਆ ਤਾਂ ਮੂੰਹ ਬੰਦ ਹੋ ਗਿਆ ਉਹਦਾ ਦੇਖੋ ਜਿੰਨਾ ਜਰ ਮਨਮੁਖ ਆ ਉਹਦਾ ਮੂੰਹ ਹੈਗਾ ਜਾਂ ਗੁਰਮੁਖ ਹੋ ਗਿਆ ਬੰਦ ਹੋ ਗਿਆ ਝੱਗੂ ਛੁੱਟਦਾ ਨਿਕਲਦਾ ਪਹਿਲਾਂ ਆਲਵਲ ਨਿਕਲਦਾ ਸੀ ਨਾ ਠੀਕ ਹੈ ਜੀ ਜਦ ਮੂੰਹ ਬੰਦ ਹੋ ਗਿਆ ਝੰਗ ਵੀ ਬੰਦ ਹੋ ਗਈ ਬੜਾ ਔਖਾ ਸੀਗਾ ਇਹ ਤੁਸੀਂ ਠੀਕ ਕਹਿ ਹੋ ਉਹਨਾਂ ਨੇ ਵੀ ਬੇਵਸੀ ਨੂੰ ਅਰਥ ਕੀਤੇ ਨੇ ਉਲਟੇ ਪਰ ਜੇ ਇਹ ਦੋ ਦੋ ਸਾਰੀ ਫਲਸਫੀ ਪੜ ਜਿਓ ਆਪਣੀ ਪਿੱਛੋ ਪਿੱਛੇ ਨਾਲ ਛੋੜਨੀ ਨਹੀਂ ਗੱਲ ਇਹ ਇਹ ਤਾਂ ਫੈਸਲਾ ਹੈ ਸਾਡਾ ਵੀ ਇਹਨਾਂ ਨੂੰ ਸਮਝ ਵੀ ਲਿਖਣਾ ਵੀ ਰਾ ਸਾਡੀ ਇੱਥੇ ਲੈਨ ਪੜ ਹਾਂਜੀ ਵੇਖੋ ਭਾਈ ਵਡਿਆਈ ਹਰ ਸੰਤੋ Swami ਆਪਣੇ ਕੀ ਜੈਸਾ ਕੋਈ ਕਰੇ ਪੈਸਾ ਕੋਈ ਪਾਵ ਹੈ ਆ ਦੇਖ ਲਓ ਇੱਥੇ ਆ ਕੇ ਗੱਲ ਮੁਕਾ ਦਿੱਤੀ ਇਹ ਜਿਹੜੀ ਵਡਿਆਈ ਹੈ ਦੇਖ ਲਓ ਉਸ ਬੰਦੇ ਨੂੰ ਵਡਿਆਈ ਮਰ ਵਿਰੋਧ ਕਰਦਾ ਸੀ ਇਹ ਕਿਹਦੀ ਵਡਿਆਈ ਹੈ ਇਹ ਵਡਿਆਈ ਇਹ ਵੀ ਹੈ ਕਿ ਸਹਮੇ ਆਪਣੇ ਦੀ ਵਡਿਆਈ ਹੈ ਸਹਮੇ ਨੇ ਬੰਦ ਕੀਤਾ ਤੂੰ ਬੰਦ ਕਰ ਲੈ ਚੁੱਪ ਕਰ ਜਾ ਫਿਰ ਭਗਤ ਹੋ ਜਾਂਦਾ ਯਾਦ ਮੂੰ ਬੰਦ ਕਰਤਾ ਬੋਲਣ ਤੇ ਹਟ ਗਿਆ ਹਾਰ ਮੰਨ ਲਈ ਗੁਰਬਾਣੀ ਦੇ ਸਾਹਮਣੇ ਉਹੀ ਭਗਤ ਕਹਿੰਦਾ ਫਿਰ ਸੱਚੇ ਮਾਰਗ 'ਚ ਚੱਲਦਾ ਉਸਤ ਕਰੇ ਜਾਨ ਪਹਿਲਾਂ ਦਾ ਰਸਤਾ ਬਦਲ ਲੈਣ ਦਾ ਹੋ ਜਾਂਦਾ ਗੁਰੂ ਦੇ ਗੁਰੂ ਵਾਲੇ ਦਾ ਚੱਲਦਾ ਫਿਰ ਗੁਰੂ ਜੀ ਮੈਂ ਚੱਲਦਾ ਜਿਉਂ ਤੂੰ ਚਲਾਏ ਤੇ ਮੈਂ ਚੱਲਣਾ ਸਵਾਮੀ ਬਹੁਤ ਚੱਲਦੇ ਨੇ ਆਪਣੇ ਮੂਰੇ ਹੁੰਦੇ ਨੇ ਕੋੜਾ ਚੱਲਦਾ ਤਾਂਗੇ ਨੂੰ ਊਰੇ ਚੱਲਦਾ ਪਰ ਜਿਵੇਂ ਮਾਲ ਜਲਾਉਂਦਾ ਪਿੱਛੇ ਬੈਠਾ ਉਹ ਵੀ ਜਲਦਾ ਹਾਂਜੀ ਇਹ ਤੇ ਜਨ ਨਾਨਕ ਆਖ ਸੁਣਾਵੇ ਕੋਈ ਪੈਸਾ ਜੇ ਉਹ ਝੱਗ ਸੜਦਾ ਸੀ ਉਦੋਂ ਮਨਮੁਖ ਸੀ ਜੇ ਉਹ ਗੂ ਆਲਾ ਹੋ ਗਿਆ ਮੂੰਹ ਬਦਲ ਲਿਆ ਫਿਰ ਉਹ ਗੁਰਮੁਖ ਹੋ ਗਿਆ ਉਹ ਮਨਮੁਖ ਹੀ ਗੁਰਮੁਖ ਬਣ ਜਾਂਦਾ ਨੈਗੇਟਿਵੇ ਬਣ ਜਾਂਦਾ ਦੇਖੋ ਕਹਿੰਦੇ ਬਿੜਾਈ ਕਿਦੀ ਹੈ ਸਤਗੁਰ ਆਪਣੇ ਨਹੀਂ ਬੜਿਆ ਗਿਆ ਉਹਨੇ ਕੀ ਬਣਾਤਾ ਉਹਨੇ ਲੋਹੇ ਨੂੰ ਸੋਨਾ ਬਣਾਤਾ ਇਹ ਬ੍ਰਹਮ ਵਿਚਾਰ ਹੈ ਇਹ ਬ੍ਰਹਮ ਵਿਚਾਰ ਹੋਵੇ ਦਰ ਹੋਗਾ ਨਾ ਸਾਚੇ ਤੈਨੂੰ ਕਿੰਡੀ ਗੱਲ ਕਹਿਤੀ ਨਾ ਸਮਝੋ ਬ੍ਰਹਮ ਵਿਚਾਰ ਦੀ ਕਰਕੇ ਔਖੀ ਸੀ ਗੱਲ ਇਹ ਬ੍ਰਹਮ ਵਿਚਾਰ ਸੀ ਇਹ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਨਾਲ ਨੇ ਤਾਂ ਸਤੂਰ ਨੂੰ ਦੱਸੀ ਆ ਵੀ ਐਸਾ ਕੁਝ ਹੋ ਰਿਹਾ ਦਰਗਾਹ ਦੇ ਵਿੱਚ ਆਦਮੀ ਨੂੰ ਐਸਾ ਜਦ ਪੱਟਦਾ ਹੈ ਜੇ ਕੋਈ ਗੁਰਬਾਣੀ ਨੂੰ ਮੰਨਦਾ ਹੈ ਤਾਂ ਉਹ ਕੀ ਬਣ ਜਾਂਦਾ ਹੈ ਨਰਕੀ ਜੀਵ ਜਿਹੜਾ ਹੈਗਾ ਉਹ ਅਮਰਸ਼ੀ ਰਾਜ ਦਾ ਮਾਲਕ ਬਣ ਜਾਂਦਾ ਕਿੰਨੀ ਬੜੀ ਪਦਵੀ ਮਿਲ ਗਈ ਸਿਰਫ ਨੂੰ ਬੰਦੇ ਕੀ ਕਹਦੀ ਕਹੀ ਨਾ ਜਾਈ ਇਹ ਦਰਗਾਹ ਦੇ ਵਿੱਚੋਂ ਇਹ ਐਡਾ ਕਰ ਰਹੇ ਆ ਦਰਗਾਹ ਨੇ ਐਡਾ ਬਦਲ ਰਹੇ ਨੇ ਜੀਬਾਂ ਇੰਨੀ ਵਡਿਆਈ ਦੇ ਰਹੇ ਨੇ ਜਿਹੜਾ ਮੰਨ ਜਾਂਦਾ ਉਹਨੂੰ ਐਡੀ ਵਡਿਆਈ ਦੇ ਦਿੰਦੇ ਨੇ ਬਰ ਜਾਂਦੀ ਹੈ ਹਾਂਜੀ ਔੜੀ ਗੁਰ ਸੱਚੇ ਬੱਦਾ ਥੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨਰ ਗੁਰ ਸੱਚੇ ਨੇ ਇਹ ਜਿਹੜਾ ਥੇ ਥੇ ਹੁੰਦਾ ਕੋਈ ਜਿੱਤੇ ਉਹ ਪੁਰਾਣਾ ਪਿੰਡ ਠੱਠਾ ਹੋਵੇ ਥੇ ਕਹਿੰਦੇ ਨੇ ਜਿਹੜਾ ਸੰਸਾਰ ਆ ਦੇ ਨੇ ਹੋਈ ਹੈ ਸਰੀਰ ਵੀ ਜੰਦਾ ਥੇ ਦੇ ਨੇ ਆਈ ਹੋਈ ਹੈ ਮਿੱਟੀ ਦੀ ਪੰਡੇ ਐ ਇਹ ਥੇ ਜਿਹੜਾ ਬੱਦਾ ਹੈ ਸਾਨੂੰ ਬੰਨ ਕੇ ਸਰੀਰ ਦਿੱਤਾ ਹੋਇਆ ਨਾ ਤਸਾਂ ਦਾ ਇਹ ਥੇ ਹੀ ਹੈ ਰਖਵਾਲੇ ਦਿੱਤੇ ਆਪਾਂ ਜਿਹੜੇ ਜੀਵ ਹਾਂ ਰਖਵਾਲੇ ਆ ਤੇ ਤੇ ਹੁਰਤੀ ਆ ਰਖਵਾਲੇ ਗੁਰ ਦਿੱਤੇ ਆ ਗੁਰ ਤੋਂ ਹੀ ਪੈਦਾ ਹੋਇਆ ਹੈ ਜੀਵਾਤ ਜੀਵਾਤ ਹੁੰਦਾ ਰਖਵਾਲਾ ਹੀ ਹੋਰ ਕੀ ਹੈ ਸਰੀਰ ਦਾ ਕਿਉਂ ਕਰਦੇ ਆਪਾਂ ਆਪਣਾ ਦਾ ਹੈ ਨਹੀਂ ਦੇਖੋ ਰਖਵਾਲਾ ਹੁੰਦਾ ਮਾਲਕ ਨਹੀਂ ਹੁੰਦਾ ਰਖਵਾਲਾ ਆ ਰਖਵਾਲਾ ਨੌਕਰੀ ਹੁੰਦਾ ਆ ਪਰਖਵਾਲਾ ਰਖਣੀ ਨੇ ਫਸਲ ਰਖਵਾਲਾ ਰੱਖਿਆ ਹੋਇਆ ਤੇ ਇਸ ਤੇ ਘਾਰ ਆ ਘੱਟ ਤੇ ਤੇ ਠੀਕ ਹੈ ਜੀ ਪੂਰਨ ਹੋਈ ਆਸ ਗੁਰ ਚਰਣੀ ਰਹਿੰਦਾ ਰਹਿਦਾ ਹੀ ਜਿਹੜੀ ਹੈ ਗੁਰ ਦੀ ਪੂਰੀ ਹੋ ਜਾਂਦੀ ਹੈ ਜੇ ਮਨ ਰਗਨਤ ਵਿੱਚ ਰੰਗਿਆ ਜਾਵੇ ਜੇ ਨਾਮ ਦਾ ਰੰਗ ਚੜ ਜਵੇ ਤਾਂ ਇਹਦੀ ਕੀਮਤ ਬੈਗੀ ਥੇਦੀ ਲਾਹ ਹੋ ਗਿਆ ਜੇ ਨਾ ਹੋਇਆ ਬੈਠਾ ਹੋਵੇ ਬੈਠਾ ਬੈਠਾ ਰਹੂਗਾ ਠੀਕ ਹੈ ਜਿਨ੍ਹਾਂ ਨੂੰ ਗੁਰ ਦਾ ਰੰਗ ਚੜ ਗਿਆ ਉਹਨਾਂ ਦੀ ਆਸ ਉਹ ਜਿਹੜੀ ਆਸ ਲੈ ਕੇ ਆਏ ਤੇ ਨਾ ਜਨਮ ਹੋਇਆ ਸੀ ਫਰੀਦ ਚ ਨਾਲ ਜੁੜੇ ਤੇ ਉਹਨਾਂ ਦੀ ਉਹ ਆਸ ਪੂਰੀ ਹੋ ਗਈ ਜਿਵੇਂ ਉਹ ਬਕਰ ਲੈਣ ਤੋਂ ਆਇਆ ਇਹ ਜੀ ਲੈਣਾ ਤੋਂ ਲੈ ਕੇ ਚੱਲਿਆ ਗਿਆ ਸੋਦਾ ਰਾਮਨਾਮ ਸੰਤਾਂ ਦਾ ਪਾਇਆ ਗੁਰ ਕੇ ਸਾਰਾ ਗੁਰ ਜਿੱਥੇ ਵੀ ਆ ਰਿਹਾ ਇੱਥੇ ਹੁਣ ਬਹੁਤਾ ਸਿਆਰੀ ਨਾਲ ਆ ਰਿਹਾ ਗੁਰ ਬੇਅੰਤ ਅਬਗੁਣ ਸਭ ਹੱਤੇ ਆਹ ਸਤਿਗੁਰ ਦੀ ਜਿਹੜੀ ਕਿਰਪਾ ਹੈ ਬੇਅੰਤ ਕਿਰਪਾ ਉਹਦੀ ਬੇਅੰਤ ਅਬਗੁਣ ਸਭ ਹੱਤੇਾਰੇ ਅਬਗਣੋਂ ਨੇ ਅਤਿ ਮਾਰਦਤੇ ਖਤਮ ਕਰਤੇ ਨਸ਼ ਕਰਤੇ ਐਸੀ ਕਿਰਪਾ ਕੀਤੀ ਇੰਨੀ ਕਿਰਪਾ ਵੱਡੀ ਕਿਰਪਾ ਹੈ ਸਤਿਗੁਰ ਦੀ ਕਿ ਸਾਰੇ ਲੋਕਾਂ ਦਾ ਆਗਣ ਛੱਡਿਆ ਹੀ ਨਹੀਂ ਕੋਈ ਘੂੜੇ ਕਬਾਤਾ ਉਹਨਾਂ ਦਾ ਦਿੱਤੀ ਮਾਰ ਦਿੱਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੀ ਐਸੀ ਕਿਰਪਾ ਗੁਰੂ ਨੇ ਆਪਣੀ ਕੀਤੀ ਆਪਾਂ ਨਹੀਂ ਕਰ ਲਿਆ ਆਪਣੇ ਬਣਾ ਲਿਆ ਤੇ ਜੋ ਪਿੱਛੇ ਕਹਿ ਕੇ ਆਇਆ ਆ ਪੌੜੀ ਦੇ ਵਿੱਚੋਂ ਸਮਾਪਤ ਕਰਤੀ ਗੱਲ ਮਾਨਕ ਸਦ ਬਲਹਾਰ ਜਿਸ ਗੁਰ ਕੀ ਗੁਣ ਇਤੇ ਜੇ ਗੁਰਦੇਵ ਚ ਇੰਨੇ ਨੇ ਜਿਹੜੇ ਸਤ ਗੁਰ ਚ ਇੰਨੇ ਗੁਣ ਹੋਣ ਉਹ ਤੋਂ ਨਾਨਕ ਤਾਂ ਸਦਾ ਹੀ ਬਲਹਾਰ ਜਾਂਦਾ ਗੁਰ ਕੇ ਹਾਂ ਬਲ ਬਲ ਜਾਈ ਉਹ ਤੇ ਸਦਾ ਹੀ ਬਲਹਾਰ ਜਾਂਦਾ ਤਾਂ ਵੀ ਇੰਨੇ ਗੁਣ ਹੋਣ ਗੁਣ ਇਤੇ ਇੰਜੇ ਹਾਂਜੀ ਅਤੇ 27ਵੀਂ ਪੌੜੀ ਸਮਾਪਤੀ ਹੈ ਜੀ